ਆਦ ਅੰਤ ਜੋ ਰੱਖਣਹਾਰ ਤਿਸ ਤੋਂ ਪ੍ਰੀਤ ਕਰੇ ਨਾ ਗਵਾਰ ਨਾ ਕਰੇ ਗਵਾਰ ਤਿਸ ਤੋਂ ਪ੍ਰੀਤ ਨਾ ਕਰੇ ਗਵਾਰ ਬਦ ਆਦ ਅੰਤ ਜੋ ਰੱਖਣਹਾਰ ਬਦ ਕੰਤਾ ਜਿਹੜਾ ਗਰੇ ਕੋ ਤਾਂ ਪਤਾ ਇੱਕ ਲੱਗ ਲੈ ਤੁਸੀਂ ਕਰਦਾ ਤਾਂ ਪੂਰੇ ਠੀਕ ਹੈ ਆਦ ਅੰਤ ਵੇਖੋ ਆਦ ਜੋ ਰੱਖਣਹਾਰ ਅਕੀਰ ਨੂੰ ਉਹਦੇ ਕੋਲੇ ਜਾਂਦੇ ਉਹਨੇ ਸਿਰ ਉਹਦੀ ਝੋਲੀ ਚ ਜਾ ਕੇ ਡੇਲ ਆਹ ਤੇ ਵਿਚਾਰ ਕਿਹਾ ਉਸੇ ਦੇ ਨਾਲ ਆ ਆਜੇ ਦਾ ਵਾਰ ਲਿਆਇਆ ਮੈਨੂੰ ਹਾਂ ਅੱਜ ਵਿੱਚ ਰੱਖਿਆ ਹੋਇਆ ਜਾਂਦਾ ਅਤੀਤ ਵਿੱਚ आदो जुगाद mm -hmm. तो शुरू होया mm -hmm. mm -hmm. ना है जते दुकान जुगाड़ है mm -hmm. आध विच ओदे रखे आधा ते ज किधर रखे रखे कौन आसात्ती कादा जुगासा दी ना दीवार हो गई आज अंत अंत कादा अतना लोकां न दऊंगा जिधर जे जद भी ते न लोकां अंत हो गया कहता सी आप करता ਜੇ ਨੇ ਆਪ ਕਰਤਾ ਜਦ ਲੋਕ ਦਾ ਆਦੇਵਾਰ ਹੋ ਗਿਆ ਚੱਕੋ ਤਾਂ ਬਾਹਰ ਮੁੱਟੇ ਮੈਂ ਆਉਂਦਾ ਐਟੇ ਖੇਡਦੇ ਨੇ ਸਾਰੇ ਕੋਈ ਖਾੜਾ ਗੱਡਿਆ ਹੋਇਆ ਜਦੋਂ ਬਾਲ ਨਿਕਲੇਗਾ ਮੈਂ ਆ ਬਈ ਮਰ ਗੱਡ ਲੈਣੀ ਗੱਡ ਚੇਰ ਕਰਤਾ ਉਹ ਬਾਲ ਵੇ ਗਿਆ ਜਦੋਂ ਗੱਡ ਖਾੜੇ ਤੋਂ ਛੁੱਟੇ ਜਿਹੜੇ ਮੈਂ ਦੇਹਦਾ ਸਿਰ ਦੇਖਣ ਦੇਖਦੇ ਆ ਦੇਖਣ ਲਾਇਓ ਉਹ ਕਹਿੰਦਾ ਮੈਂ ਖੇਡਣ ਜਾਣਾ ਤੇ ਖੜੂ ਅੰਦਰ ਖੇਡਣ ਲਾਇਆ ਸੀ ਉਹ ਉਹ ਜੋ ਵੀ ਸੀ ਖੇਡ ਗਿਆ ਬਰਾਗੀ ਬਰਾਗੀ ਕੰਤਾ ਬਰਾਗੀਆਂ ਖੇਡ ਘਤ ਕੇ ਚਲਾ ਗਿਆ ਆਸਨ ਯੋਗੀ ਨੂੰ ਅਲੈਕੁਮ ਸਲਮ। ਯੋਗੀ ਬਬਰਾ ਆ ਬੜੀ ਖੇਟੀ। ਬੱਚਾ ਗਈ ਬਬੂ ਦਾ ਸੌ ਪਈਏ। ਆਦਸਨ ਦੇ ਬਬੂ। ਆ ਰਹੀ ਆ ਤੇ ਆ। ਆਦਸਨ ਸਰੀਰ ਤੇ ਲਾਇਆ ਸੀ ਉਹਨੇ। ਆਦਸਨ ਕਹਿੰਦੇ 84 ਅਸਨ ਕੀਦੇ ਯੋਗੀ ਨੇ। 84 ਅਸਨ ਸਰੀਰ ਦੇ ਹੀ ਨੇ। ਇਹ ਆਸਣ ਦਾ ਬਹੁਤ ਭੂਤ ਭਈਓ ਲੈ ਲੋ ਆਜਨੇ ਦਾ ਇਹ ਭੂਤ ਜਿਹੜੇ ਆਸਣ ਤੇ ਸਰੀਰ ਦੇ ਜੇ ਲਾਉਂਦਾ ਸੀ ਸਰੀਰ ਦੇ ਆਸਣ ਉਹ 84 ਆਸਣ ਦੀ ਉਹ ਜੋਰ ਪਈਏ ਸਖਲੂ ਭੂਵੀ ਸੀ ਉਹਦੇ ਤਾਂ ਜਿਹੜੀ ਕਮਾਈ ਸੀ ਸਰੀਰ ਦੀ ਜੋਗ ਜਿਵੇਂ ਦੱਸਦਾ ਹੈ ਰਾਮ ਦੇ ਕੋ ਤਾਂ ਸੋਇਆ ਬੇਰੀ ਉਹ ਜੌਗੀ ਦਾ ਸਵਾਹ ਬੜੀ ਹੋ ਗਈ ਬੜਨ ਉਹ ਸਰੀਰ ਦੀਆਂ ਬਿਮਾਰੀਆਂ ਦੱਸਦਾ ਅੰਤ ਕੀ ਸਵਾ ਉਹ ਵਿਚਾਰਾ ਜੋਗ ਯਾਤਰਾ ਕੇ ਚਲਾ ਗਿਆ ਉਹ ਬਚਿਆ ਉਹਦੀ ਆਪਣੀ ਸਵਾ ਹੋ ਗਈ ਥੋੜੀ ਰੱਖਿਓ ਨਾ ਕੀ ਕਰਦੀ ਇਹ ਥੋੜਾ ਜੋ ਕਰੋਂਦਾ ਉਹਦਾ ਤਾਂ ਸਵਾ ਬੜੀ ਪਈ ਆ ਇਹਦੇ ਨਾਲ ਨਹੀਂ ਬਚਣਗੇ ਸਰੀਰ ਦੀ ਬਾਈ ਦੱਸੋ ਹਾਂਜੀ ਕਹਨਾਂ ਆਇਓ ਜਦ ਤਮਾਜਾ ਜਿੰਨਾ ਬਾਹਰ ਨਿਕਲ ਗਿਆ ਨਾ ਪਹਿਲਾਂ ਹੀ ਮੇਰੇ ਖੜਨਾ ਹੀ ਦੀ ਸਮਝ ਗਿਆ ਖੇਡ ਦਾ ਕੌਣ ਲੈ ਚੜਉਂਦਾ ਹੱਕਾਰ ਸੁਤਾਲ ਘਲੋ ਯਹ ਕਾਰਟੀ ਵਿੱਚ ਖੜਨਾ ਤੂੰ ਜੇ ਕੱਢੋ ਮੈਂ ਤਾਂ ਬਾਹਰ ਹਾਂ ਹਾਰੇ ਨਹੀਂ ਹੈ ਬੰਦ ਜਿਤਨਾ ਚਾਹੁੰਦਾ ਹਰ ਕਿਸੇ ਨੂੰ ਮਰਹਾ ਵੀ ਉਹ ਨਹੀਂ ਸੰਭਾਉਂਦਾ ਮਾਰ ਕੇ ਹਾਰੇ ਜੀਤ ਹੈ ਜੇ ਮਨਨੇ ਦੁਨੀਆ ਦੀ ਵਡਿਆਈ ਸ਼ਰਤੀ ਕਰਨਾ ਦਾ ਵਾਸਤੇ ਵਡਿਆਈ ਵਾਸਤੇ ਇਹ ਬੜਈਓ ਸ਼ਰਤੀ ਘਟਣਾ ਹਤੀ ਲੋੜ ਕੀ ਨਹੀਂ ਜੀ ਮੋੜ ਜੇ ਮਾਰ ਕੇ ਜੀਤੇ ਹਾਰ ਹੈ ਫਿਰ ਆਤਮਿਕ ਬੂਧ ਜਰੇ ਜਣੀ ਤੇ ਜੋਗ ਨਹੀਂ ਆਉਣਾ ਹੈ ਜੋਗ ਤਾਂ ਹੋਗਾ ਜੇ ਸੰਸਾਰੀ ਜਿਹੜਾ ਵੜਿਆਈ ਹੈ ਇਹਨੂੰ ਤਿਆਗ ਕੇ ਦਾਸ ਸਾਹਿਬ ਸਹਿਰ ਕਰਦੇ। ਸੰਸਾਰੀ ਦਾਸ ਮੁਝ ਦਾਸ ਸਭਨ ਸਾਰਿਆਂ ਦਾਸ ਬਣਾ ਲੈ। ਆਪਣੇ ਨਾ ਬਣਾ। ਸਭਨ ਦਾ ਦੀ। ਸਭਰ ਕਾ ਕੀ ਲੋ। ਅਗਦੀ ਗੱਲ ਕਰਦੇ ਤੁਸੀਂ ਪਾਸਾ ਦੇ। ਦਾਸ ਸੁਭਨ ਕਾ ਕੀਨੋ ਹੋ ਹੀ ਕਿਆ ਦੀਨੋ ਜੜੀ ਉਹ ਇਹਦੇ ਵਿਚੇ ਉਹ ਐਸਾ ਗੱਲ ਕੀ ਲੈਣਾ ਉਹ ਐਸਾ ਗੱਲ ਕੀ ਹਾਰ ਤਿਸੋ ਪ੍ਰੇਤਨਾ ਕਰੇ ਗਵਾਹ ਤਿਸੋ ਪ੍ਰੇਤਨਾ ਕਰੇ ਗਵਾਹ ਤੂੰ ਕਿੱਡਾ ਮੂਰਖ ਆਦਮਤ ਜਿਹਨੇ ਰੱਖਿਆ ਕਹਦੀ ਆ ਉਹਦੇ ਨਾਲ ਪ੍ਰੇਤ ਦੀ ਹੋਰ ਇਹਨੂੰ ਸਬਦ ਕਰਤਾ ਤੂੰ ਮੂਰਖ ਵੀ ਹੈ ਤੇ ਕੋਰ ਵੀ ਆਇਆ ਸਾਥ ਪਰਿਵਾਰ ਦੇ ਵਿੱਚ ਨੇ ਇਹ ਵਾਲਾ ਵੀ ਚਲੋ ਉਹਨੂੰ ਤਾਂ ਲਿਆਜ ਰੱਖੀ ਕਿ ਜੇ ਜੇ ਗਾਂ ਬੋਲ ਪਿਆ ਉਹ ਗਾਂ ਬੋਲ ਪਿਆ ਹੋਰ ਕਿਉਂ ਜੇ ਚੁੱਪ ਕਰ ਜਾਂਦਾ ਨਾ ਬੋਲ ਪਿਆ ਉਹ ਕਾਸਾ ਰਹੀ ਹੈ ਜਾ ਕੇ ਸੇਵਾ ਕਰਨਾ ਤਾਂ ਚੱਲਦੀ ਹੈ ਗੱਲ ਉਹ ਤਾਂ 3 ਚੰਦ ਬੈਠਾ ਨਾ ਉਹ ਵੀ ਕਹ ਰਿਹਾ ਰਲ ਤਾ ਇਸੇ ਗ੍ਰੰਥੀ ਉਹਦੇ ਮੁਕਾਬਲੇ ਤੇ ਕਥਾ ਹੋ ਰਹੀ ਹੈ ਤਾਂ ਨਹੀਂ ਆਇਆ ਸੀ ਸੋਹਣੀ ਸਾਹਿਬ ਬਣਾਤੀ ਹੋ ਸੀ ਚੰਦ ਕਿਹੜੀ ਬਾਣੀ ਉਹ ਕਹਿੰਦਾ ਬਾਣੀ ਕਿਹੜੀ ਇਹਨੂੰ ਸਮਝ ਲੂ ਉਹਦੇ ਬਹੁਤ ਸੁੱਖ ਹੋ ਉਹ ਕਹਿੰਦਾ ਹੋਈ ਨਹੀਂ ਸਰੀ ਨਾ ਢੜੋ ਤੜੀ ਜੋਈ ਹੋਈ ਆ ਬਾਣੀ ਤਾਂ ਆਇਆ ਦਿਓ ਇਹ ਮੈਂ ਤੇ ਕਿਹੜੀ ਬਣੀ ਸਤੇ ਬਲਵੰਨ ਦੀ ਦੇ ਜਵਾ ਦੇਤੀ ਇਹਨੂੰ। ਉਹ ਮੋਰੇ ਸਾਹਿਬ ਕੀਤਾ। ਉਹ ਕਹਿੰਦੇ ਸਾਡੀ ਗੱਲ। ਤੁਹਾਡਾ ਜੋ ਮਨਤਾ ਤੋਂ ਤੁਹਾਡੀ ਨਾ ਕਹੇ ਸਾਡਾ ਇਧਰ। ਕਿਹਦੀ ਬਾਣੀ ਕਿੱਥੇ ਚਲਣੀ ਹੈ ਸਾਡਾ। ਤੁਹਾਡਾ ਤਾਂ ਮਤਲਬ ਨਹੀਂ ਤੁਸੀਂ ਮੰਨੋ ਵੀ ਤੁਸੀਂ ਮੰਨਦੇ ਹੋ। ਨਾ ਗੁਰੂ। ਕੱਦ ਪੜਾ ਲੈ ਪਾ ਲੈ। ਆ ਬਾਣੀ ਹੈ ਇਹਦੇ ਤੇ ਦੱਸੋ ਵੀ ਗੁਰਦ੍ਰੇ ਪਾਣੀ ਰਚੀ ਹੈ, ਅਮਰਦਾਸ ਜੀ ਰਚੀ ਹੈ, ਰਾਮਦਾਸ ਜੀ ਰਚੀ ਹੈ। ਇਹ ਅਰਥ ਦੀ ਜੀ ਪਈਆ ਸਾਹੀਏ ਫਕਤ ਸਾਤੇ ਜਿਹੜੇ ਛਾਣੇ ਬੱਦੇ ਸੀ ਸਭ ਦਸ ਸੀ ਉਹਨਾਂ ਨੇ ਉਹਨਾਂ ਨੇ ਕਿ ਉਹਨਾਂ ਤੋਂ ਚਾਸ ਵਰਕੀ ਹੈ ਜੀ ਕੋਈ ਕੀ ਕਰਦਾ ਪ੍ਰਾਣੀ ਸੱਤ ਜੀ ਪਾਪ ਨੂੰ ਕਿੱਥੇ ਕਰਦੇ ਸੀ ਕਿ ਕਦੇ ਮੰਨ ਲਿਆ ਤਾਂ ਇਹ ਤਾਂ ਮੁੱਦਿਆ ਸੀ ਕੱਲ ਉਹ ਤਾਂ ਬਹੇ ਦੀ ਸੀ ਕਿ ਬਤਾ ਗੁੱਸੇ ਦਾ ਦੰਦੇ ਪੜੀ ਗੱਲ ਨਹੀਂ ਆਉਂਦਾ ਪ੍ਰਸੰਤਾਂ ਤੋਂ ਜੱਗਤਾਂ ਨੂੰ ਗੱਲ ਇਹ ਹੈ ਅਪਣਯਤ ਹੋ ਬੁਲਾਈ ਦਿਉਣਾ ਜਵਾਗੰਦੀ ਬੋਲ ਨਹੀਂ ਦੇ ਸਕਦਾ ਅਦਾਇਤੀ ਜਿਹੋ ਤੇ ਲੋਕਾਂ ਅਲਕੀਏ ਜਾਕੀ ਸੇਵਾ ਨਵਨਿਦ ਪਾਵੈ ਤਾ ਸੋ ਮੂੜਾ ਮਨ ਨਹੀਂ ਲਾਵੈ ਜਾਕੀ ਸੇਵਾ ਜਿਦੀ ਕਹੀ ਜਾਣ ਨਾ ਮਾਇਆ ਉਹ ਮਾਇਆ ਤਾਂ ਕਿੰਨਾ ਸੇਵਾ ਦਾ ਹੀ ਮਿਲ ਜਾਂਦੀ ਆ ਵੇ ਜਦੋਂ ਸਾਰੀ ਹੋ ਸੀ ਉਹ ਬੰਦ ਨੇ ਸਾਰੇ ਕਬਜ਼ਾ ਕੀਤਾ ਹੈ ਨਾ ਦਰਵਾਜ਼ੇ ਜੋੜਨ ਸਰ ਜਦ ਘੋਲੇ ਹੀ ਲੋਨੇ ਤਾਂ ਰਾਜੇ ਹੋ ਗਿਆ ਫਿਰ ਸਭ ਜਿਹੜਾ ਪੁੱਠਿਆ ਅਫਗਾਨ ਉਹ ਨੌਨਦ ਜਾਲ ਇੱਕ ਨਵੇਂ ਗਿਆਨ ਨਾਲ ਜਿਆਦਾ ਹੁੰਦਾ ਹੈ ਹੁਣ ਦਾ ਜੀ ਸਰਦਾਰ ਨਵੇਂ ਗਿਆਨ ਦਾ ਨੌਨਦ ਕਹੇ ਦਿੱਤੀ ਖਜ਼ਾਨੇ ਨੂੰ ਕਹਿਣਾ ਦੱਬਦਾ ਹੁਣ ਨਵ ਸੇਵਾ ਤੋਂ ਮਿਲਦਾ ਗਾਥੀ ਸੇਵਾ ਤਾਂ ਮਿਲਦਾ ਉਹ ਤਾਂ ਸੱਚਾਰਦਾ ਬਿਨਾਂ ਸੇਵਾ ਤੇ ਮਿਲਿਆ ਸਭ ਉਹਦਾ ਕਿਹਾ ਜਿਹਦੇ ਕਰਪਾਣਾ ਧਰਤੀ ਤੇ ਬਸਦਾ ਉਹ ਤਾਂ ਪਹਿਲਾਂ ਗੱਲ ਬੁੱਧੀ ਹੀ ਨਾਲੇ ਹੱਥੋਂ ਕਿਤੇ ਨਾ ਚੋਰ ਆਰਾਮ ਘੋੜਾ ਲੈ ਆ ਤੇ ਕਿਤੇ ਮੂਰਖਾਤ ਕੋਲ ਸੌਣ ਲੜਿਆ ਸੀ ਤੇ ਤੁਸੀਂ ਕਹੋ ਮੂਰਖਾਤ ਕੋਲ ਦੀ ਸੁਣਨ ਵਾਲੇ ਜੋ ਅਰਥ ਹੈ ਕਿ ਤੁਸੀਂ ਕਹ ਆਵੇ ਗਲਤ ਨੇ ਅਰਥ ਤੇ ਜਿਹੜੀ ਗੱਲ ਨੂੰ ਉਹ ਜਾਣਦੇ ਸੀ ਬੂਢਾ ਧੋਗ ਨਹੀਂ ਉਹ ਆਪਣੇ ਖਰਦੇ ਤੁਸੀਂ ਵਥੇ ਦੇਂਦੇ ਰਹੋ ਨਾ ਵਥਾ ਦੇਖਦੇ ਰਹੇ ਪੰਜ ਦੇ ਰਹੇ ਜੇ ਗਿਆਨ ਹੁੰਦਾ ਚੌਂ ਦੇ ਹੁਣ ਦੇ ਰਹੇ ਪਰ ਅੱਖ ਨੇ ਕਿਤੇ ਦੇਖਣੇ ਨਹੀਂ ਰਹੋਗੇ ਆਪਾਂ ਚਾਹਾਂ ਤੇ ਪਕਾ ਲੱਗੂਗਾ ਸਮਝ ਗਏ ਜਾਕੀ ਸੇਵਾ ਨਵਨਿਤ ਪਾਵੈ ਤਾਂ ਸੋ ਬੂੜਾ ਮੰਨ ਨਹੀਂ ਲਾਵੇ ਜਾਗੀ ਸੇਵਾ ਨੰਨਤ ਪਾਲਣੀ ਇਹਦੀ ਸੇਵਾ ਨਾਲ ਨਵਾ ਨਵਾ ਖਿਆਲ ਨੂੰ ਬਣਦਾ ਗਿਆਨ ਸਰ ਸੇਵਾ ਕੀ ਉਹਦੀ ਗੁਰ ਸੇਵਾ ਸ਼ਬਦ ਵਿਚਾਰ ਹੈ ਜਿਹੜੇ ਉਹਨਾਂ ਨੂੰ ਉਪਦੇਸ਼ ਕੀਤਾ ਉਹਦੇ ਵਿਚਾਰ ਕਰੋ ਹੀ ਸੇਵਾ ਉਹਦੀ ਤੁਹਾਡੀ ਜੋ ਦੇਖੋ ਬਾਸਤੀ ਸੇਵਾ ਕੀ ਹੈ ਬਾਸਨ ਨੇ ਉਹ ਸਬਕ ਪੜਾਇਆ ਗੁਰੂ ਪੱਕਾ ਕਰਕੇ ਲੈ ਜਾਓ ਬਾਸਨ ਖੁਸ਼ ਤੁਹਾਡੀ ਉਹਦੇ ਨਾਲ ਹੂੰ ਜਿਹਦੇ ਉਹ ਸਬਕ ਕਰ ਲਾ ਆਯਾ ਜੀ ਜਿਹੜਾ ਜਾਊਗਾ ਫਸਟ ਮਾਸ ਫਸ ਭਗਵਾਨ ਹੋ ਜੀ ਤੂੰ ਨੇ ਪੜਾਇਆ ਉਹਦਾ ਹੀ ਸੇਵਾ ਉਹ ਕਹਿੰਦਾ ਵੀ ਤੁਸੀਂ ਜੋ ਮੈਂ ਪੜਾਤਾ ਉਹ 100 ਪੀਸੇ ਦਿਨ ਨੂੰ ਲੈ ਜਾਓ ਫਿਰ ਮੈਂ ਖੁਸ਼ ਹਾਂ ਕਿਹੜਾ ਵੀ ਨਾ ਮਨੇ ਦੇਰੇ ਹੋ ਉਹ ਜੋ ਬਾਸਕੋ ਗਿਆ ਮੈਂ ਤੇਰੇ ਕੋਲ ਤਾਂ ਹੈ ਜੀ ਤੇਰੇ ਵਾਤੇ ਦਾ ਰੋਬ ਨਹੀਂ ਤੇ ਜਾ ਹੋ ਜੋ ਗਿਆਨ ਦੇ ਕਾਲਜ ਕੋਲ ਤੇ ਲੈ ਕੇ ਆਇਆ ਤੇਰੇ ਬਾਤ ਦਾ ਨਮਰਤਈ ਹੈ ਤੈਨੂੰ ਕਿਹੜਾ ਪਤਾ ਸੀ ਕਿ ਬਤਾਉਂਦਾ ਜਾਂਦਾ ਕਿ ਉਹ ਉੱਥੇ ਪੜ੍ਹ। ਤੇਰੇ ਬਾਸਰ ਉਹ ਵੀ ਨਮਰਤਈ ਹੈ ਲੋਕਿਆ ਨਹੀਂ ਤੇਰੇ ਕੋਲ ਤਾਂ। ਯਕੀਨ ਸੇਵਾ ਨਮਨਤ ਪਾਵੈ। ਤਾਂ ਸੋ ਮੂੜਾ ਮੰਨਈ ਲਾਵੈ। ਤਾਂ ਸੋ ਮੂੜਾ ਬੁਲਦੀ ਸੋ। ਕੋਈ ਨਾ ਨੇ। ਵਾਇਆ ਨਾ ਮੋੜੀਂ ਕਰਦਾ। ਪਾਰਿਆ ਰਬ ਜੀ। ਜਦੋਂ ਮਾਣੀ ਬਟਾ। ਜਿਹੜੀ ਜੀ ਦੇਖ ਲੈਂਦਾ ਵਧੀਆ ਉਸੇ ਕਹਿੰਦਾ ਵੀ ਅਸੀਂ ਕੀ ਗੱਡੀ ਲੈ ਲਈਏ ਅਸੀਂ ਰਾਹ ਕੋਠੀ ਪੜਾ ਲਈਏ ਅਸੀਂ ਆਉ ਕਰ ਲਈਏ ਆਇਆ ਤੇ ਉਸ ਜ਼ਿਆਦਾ ਬੁਢਾ ਭਾਇਆ ਵੱਡਾ ਜੋੜਦਾ ਤਾਂ ਸਿਰ ਮੂੜਾ ਬੁਢੀ ਨਾ ਵਿਚਾਰਦਾ ਹੀ ਕੀ ਜੋ ਠਾਕਰ ਸਦਾ ਸਦਾ ਹਜੂਰੇ ਹਜੂਰੇ ਜੋ ਠਾਕਰ ਸਦਾ ਸਦਾ ਹਜੂਰੇ ਤਾਂ ਕੋ ਅੰਦਾ ਜਾਣ ਹਜੂਰੇ ਜੋઠાਨ ਸੰਸਦਾ ਹਜੂਰ ਹੈ ਹਜੂਰ ਕੀ ਹਜੂਰ ਸੰਸਦ ਹੈ ਹਜੂਰ ਬਹੁਤ ਡੀਪ ਲੱਗਦਾ ਹਜੂਰ ਲਫ਼ਜ਼ ਹੈ ਉਰਦੂ ਦਾ ਜਿਵੇਂ ਇਹਦੇ ਵਿੱਚ ਥੋੜੀ ਜਿਹੀ ਪੌਣੀ ਹੋ ਲੱਗ ਉਤਰੀ ਏ ਹੱਜ ਕਿ ਲਹੂ ਦਾ ਹੱਜ ਕਾਪੇ ਹਾਂ ਜਾਈ ਜਾ ਹਜੂਰ ਅੱਧੜਾ ਆ ਉੱਥੇ ਉਹ ਇੱਥੇ ਅੱਧੜਾ ਹਜੂਰ ਹਜੂਰ ਹਜੂਰ ਜਿੱਤੇ ਹਾਜੋਤਾ ਉਹਦੇ ਵਿੱਚ ਹੈ ਹਜੂਰ ਜਹਾਂ ਜਲਦਾ ਜੀ ਹਜੂਰ ਜੇ ਅਸੀਂ ਇਹ ਅਰਥ ਲਾਉਂਦੇ ਹਜੂਰ ਇੱਥੇ ਆਲੇ ਫਿਰ ਤੂੰ ਅਫਸਰਾਂ ਤੇਰੇ ਹਜੂਰ ਕਿਹੜਾ ਹੋ ਜੀ ਜੀ ਹਿੰਦੂ ਜੀ ਤਾਂ ਉਲਟਾ ਹੋ ਹਜੂਰ ਫਿਰ ਰਾਜੇ ਦੇ ਹਜੂਰ ਕਿਹਦਾ ਕੋਈ ਆਕੇ ਹਜੂਰ ਦਾ ਮੈਂ ਚੈਨ ਚਲ ਰਿਹਾ ਹਾਜ਼ਰ ਹਜ਼ੂਰ ਨਹੀਂ ਕਰਦੇ ਹਾਜ਼ਰ ਹਮ ਵਾਲਾ ਸੁਣੀ ਜੂਰ ਜੋ ਹਾਜ਼ਰ ਹੈ ਉਹ ਤਾਂ ਦਾਅ ਹੈ ਤੂੰ ਤਾਂ ਕਹਿ ਦਈਏ ਸਲਵਾ ਪੌਸਨ ਬਾਕੀ ਉਹ ਤਾਂ ਕੀ ਹੈ ਹਜ ਤੋ ਬਣਿਆ ਹਜ਼ੂਰ ਲੱਗ ਉਹਨੂੰ ਤਾਂ ਹਜ਼ੂਰ ਜਿੱਥੇ ਰਹਿੰਦਾ ਉੱਥੇ ਜਾਈਏ ਹਜ਼ੂਰ ਤਾਂ ਸਾਹਮਣੂ ਆ ਕਹਿੰਦੇ ਨੇ ਆਪਾਂ ਸਾਹਮਣੂ ਕਹਿੰਦੇ ਹਜ਼ੂਰ ਤਾਂ ਕਿਹਨੇ ਨੇੜੇ ਵੀ ਚੱਲ ਜੀਦੇ ਆਉਂਦਾ ਹਜ਼ੂਰ ਉਹ ਹਜ਼ੂਰ ਹੈ ਉਹ ਹਜ਼ੂਰ ਦੱਤੇ ਨਾਲ ਹੈ ਪਾਜੀ ਦੱਤੇ ਨਾਲ ਬਸ ਜੇ ਰਾ ਅੰਧਾ ਜਾਣ ਕੋ ਦੂਰੇ ਦੂਰਾ ਕਹਣਾ ਸੋਚਿਆ ਹੋਇਆ ਸੀ ਅੰਧਾ ਦੂਰਾ ਜੋ ਠਾਕਰ ਸਾਡੇ ਸੁਣਾ ਮਜੂਰੇ ਸਾ ਤੋਂ ਅੰਧਾ ਜਾਣ ਕੋ ਦੂਰੇ ਫਿਰਦੇ ਦੇ ਵਿੱਚੇ ਦੇ ਵਿੱਚੇ ਅੱਤਰਵਾਂ ਧਰੋ ਲਾਲ ਹੈ ਤੇ ਫੇ ਤੂੰ ਕੀਆ ਰੋਸ਼ਨੀ ਉਹ ਕੀ ਹੈ ਦੀਵਾ ਤੇ ਦੀਵਾ ਤਾਂ ਰੋਜ਼ ਨੇ ਨਾਲੇ ਰਹੂਗਾ ਰੋਜ਼ ਰਹੂਗਾ ਤੇ ਰੋਜ਼ ਨੇ ਜਿਹੜਾ ਜਿਹਨਾਂ ਦੀਵਾ ਹੈਗਾ ਦੀਵਾ ਪਹਿਲਾਂ ਰੋਸ਼ਨੀ ਹੈ ਜੇ ਉਹ ਦੀਵਨ ਭੂਖਮਾਰ ਦੇ ਰੋਸ਼ਨੀ ਬੰਦੋ ਜੀ ਦੀਵਾ ਫਿਰ ਵੀ ਹੈਗਾ ਹੀਵਾਨੇ ਕਹਤੇ ਜਾਂਦਾ ਜੇ ਉਹਨੂੰ ਭੂਖਮਾਰ ਤੇ ਦੀਵਾ ਹੈ ਦੀਵਾ ਹੈਗਾ ਦੀਵਾ ਫਿਰ ਵੀ ਦੀਵੜੇ ਗਿਆ ਬੁਝਾਏ ਘੱਟ ਰੋਟਿਆ ਦੀਵੜੇ ਗਿਆ ਬੁਝਾਏ ਦੀਵੜਨ ਤੋੜ ਤੇ ਤੋੜ ਕੇ ਤਾਂ ਨਹੀਂ ਗਿਆ ਬੁਝਾ ਕੇ ਗਿਆ ਦੀਵਾ ਦਾ ਨਹੀਂ ਬਣਿਆ ਬੁਝਾਇਆ ਹੀ ਆ थेज है। है, है। तेज आलू तेज आलू तेरो तीरे भाई सु तेरवती के मारीया तू के मारीया वजह तेरे खिचे खिंच है हां तेले खिचे हां तेज थे। थे तेज खिचे वाटे ना जलदा दी बाहर नाल ते बच जा सो ठाकर सदा सदा मजूरें सोचा के या जान दूर है सोचा बिजली तक खुलदी है सोचा करती ਲਾਈਟ ਬਾ ਦਿਨ ਆ। ਭਰਮਾ ਠਾਕਰ ਨਦਰਨਾਵ ਚੁੱਥੀ ਵੀ ਗੈਰ ਹੈ। ਹਾਂ। ਬਾਤ ਕਰਨ ਲੱਗ ਟਿਕਾਉਂ। ਹਾਂ। ਹਾਂਜੀ। ਜੋ ਠਾਕਰ ਸਾਦੇ ਸਦਾ ਹਜੂਰੇ ਤਾਕੋ ਅੰਧਾ ਜਾਣ ਤੋਂ ਦੂਰੇ। ਇਹ ਆ ਉਹਨੂੰ ਆਪਣੇ ਘਰ ਤੋਂ ਪਰੇ ਬਣੀ ਬੈਠਾ। ਰੋਜ਼ ਉੱਥੇ ਜਾਂਦਾ ਇਹ ਤਾਂ ਉਹਨੂੰ ਬਾਹਰ ਫੜਾਈ ਬੈਠਾ। ਭਰਮਾ ਠਾਕਰ ਮਦਨਾ ਦਾ। ਪਾਂ ਲਾ ਗਾਡ ਬਿਲੇਟ ਕਾ ਵੇ ਗੱਲ ਚ ਪੱਥਰ ਰੱਖ ਲੈ। ਘਾਰਾ ਜੇ ਘਾਰਾ ਦੀ ਜਾਂਦਾ ਫਿਰ ਅਨਾ ਹੀ ਹੋਇਆ ਨੋ ਹੈ। ਇਹ ਅਕਲ ਅੱਖਾਂ ਹੈਗੀਆਂ ਨੇ ਅੱਖਾਂ ਤੋਂ ਅਡੋਨੀ ਅਕਲ ਦਾ ਨਾ। ਅਕਲ ਹੈਗੀ ਇਹ ਦੇਖੀ। ਪਾਵੇ ਦਰਗਾਹ ਮਾਨੋ। ਜਾ ਕੇ ਪਾਵੇ ਦਰਗਾਹ ਕੋਲ। ਜਿਹਦੀ ਤਹਿਲ ਦਰਗਾਹ ਮੰਦੋ ਆਉਂੂ ਕਹਾ ਇਸੇ ਕੁਸਾਰੇ ਮੁਗਲ ਅਜਾਮ ਉਹ ਟਾਇਲ ਬਲੀ ਫਿਰਦਾ ਉਹ ਕਰਦਾ ਉਹ ਸੇਵਾ ਨਹੀਂ ਕਰਦਾ ਉਹ ਜਿਸੇ ਦਾ ਅਜਾਮ ਨੇ ਅਜਾਮ ਤਾਂ ਹੈਗਾ ਨਾ ਪਤਾ ਹੀ ਨਹੀਂ ਗੱਲ ਦਾ ਸਾਰਾ ਪਤਾ ਨਹੀਂ ਹੈ ਜਾਣਕਾਰੀ ਨਹੀਂ ਹੈ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦਾ ਜੇ ਕੋਈ ਦੱਸ ਦੇ ਤਾਂ ਕਾਹਨ ਹੀ ਪਹੁੰਚਾ ਕੀ ਗੱਲ ਹੈ ਜਿਹੜੀ ਕਹੀ ਸੀ ਆਹ ਕੋਈ ਨਹੀਂ ਕਰਦਾ ਉਧਰ ਵੀ ਜਾਂਦਾ ਜਿਹਨਾਂ ਦੱਸਣਾ ਨੇ ਉਹ ਬਾਹਰ ਸਤਾਪਤ ਕਰਦੇ ਢਾਗਰ ਦੇ ਵਾਲੇ ਉਹਦੇ ਛਾਵਾ ਹੀ ਉਹ ਉਹਨੂੰ ਪਤਾ ਵੀ ਅੰਦਰੇ ਹੁੰਦਾ ਫਿਰ ਉਹ ਜੇ ਅਸਲੀ ਤੋਂ ਡਰਦੇ ਹੋ ਤਾਂ ਅਗਲੀ ਵਾਰ ਬਲੂਡ ਚਲੂ ਸਦਾ ਸਦਾ ਇੱਕੋ ਲੁਣਹਾਰ ਸਦਾ ਸਦਾ ਇੱਕੋ ਲੁਣਹਾਰ ਨਾਨਕ ਰੱਖਣ ਹਾਰ ਅਪਾਰ ਮੈਂ ਕਹਿੰਦਾ ਹੱਲ ਜਨ ਵਿੱਚ ਢੁੱਲ ਜਾਂਦਾ ਹੈ ਇਹੀ ਕੋਈ ਚਾਹਤਾ ਸਦਾ ਉਹ ਤੋਂ ਉਹਦਾ ਕੋਈ ਸੌਦਾ ਸਭ ਕੀ ਕਰ ਚਲੇ ਇੱਥੇ ਬਿਜਾਰਦਾਰ ਵੀ ਲੈਣ ਬਿਜਾਰ ਚਾਹ ਕੇ ਸੌਦਾ ਢੁੱਲ ਜਾਂਦਾ ਉਹ ਬਿਜਾਰ ਮੂਸੇ ਤੂੰ ਸੇ ਜਿੱਤੇ ਨੇ ਕੋ ਦੇਖਦਾ ਦੂਤਾ ਕਰੇ ਕੋਈ ਮਜਬਾਨ ਲੱਗਿਆ ਉਹਦੇ ਜੋ ਘਰ ਦੀ ਗੱਲ ਢੁੱਲ ਜਾਂਦੀ ਹੈ ਉਜਦੇ ਪਤਾ ਲੱਗਦਾ ਹੈ ਘਰ ਦਾ ਆ ਕੇ ਨਾ ਤੂੰ ਸਾਰਾ ਦਿਨ ਇੱਥੇ ਜਪਦਾ। ਵਜਾ ਦੂਗਾ ਲਖਤ ਹੋ ਜਾਂਦੀ। ਤੇ ਜਦੋਂ ਪਤਾ ਲੱਗਦਾ ਕਬੀਰ 23 ਜਾ ਕੇ ਚੰਗਰ ਮੂਰ। ਜਦੋਂ ਜੇ ਕੀ ਹੋ ਗਿਆ ਘਾਟੀ ਦਾ ਵੱਜ ਗਈ। ਪੰਜਾ ਜੋ ਖਾ ਹੋ ਗਈ। ਲਿਖਾਈ ਦੀ। ਕਾਲ ਬਿਲੇ ਗਿਆ ਰਾਸਾਈ ਬਿਲੇ ਗਿਆ ਤਾਂ ਕਾਗਜੀ ਵੀ ਰਹਿ ਗਿਆ ਤੇ ਨੀ ਕੁਝ ਬਣੀ ਡੈਗਲਾ ਉੱਠ ਤੰਗ ਹੋਰੇ ਜਿਹਾ ਡੈਗਲਾ ਉੱਠ ਬਾਂਗ ਲਿਗਿਆ ਸਦਾ ਸਦਾ ਇਹ ਭੋਲਣ ਹਾਰ ਨਾਨਕ ਰੱਖਣ ਹਾਰ ਅਪਾਰ ਸਦਾ ਸਦਾ ਇਹ ਭੋਲਣ ਹਾਰ ਭੋਲਣ ਹਾਰ ਦੀ ਭੋਲਣ ਭੋਲਣ ਹਾਰ ਨਾਨਕ ਰੱਖਣ ਹਾਰ ਅਪਾਰ ਨਾਨਕ ਰੱਖਣ ਹਾਰ ਅਪਾਰ ਜਿਹੜਾ ਰੱਖਣ ਹਾਰ ਉਹ ਪਾਰ ਉਹ ਨਹੀਂ ਬੋਲਦਾ ਉਹ ਬੁੱਲਾ ਨਾ ਬੁੱਲੇ ਕਿਸੇ ਦਾ ਬੁੱਲਾ ਹੋਈ ਹੈ ਰਾਤ ਨੂੰ ਤੇ ਆ ਕੌਡੀ ਸੰਗ ਰਚਿਆ ਜੇ ਭੁੱਲ ਜਵੇਂ ਸਾਹ ਲੈਣਾ ਬਸ ਗਿਆ ਉਹ ਸੌ ਗਿਆ ਭੁੱਲ ਗਿਆ ਜੇ ਚੱਪਕਾਉਂਦਾ ਨਾ ਡਰਵਰ ਨੂੰ ਉਹਨਾਂ ਵੀ ਜਿਹੜੇ ਭੁੱਲਦਾ ਐਕਸੀਡੈਂਟ ਜਿਹੇ ਹੋ ਜਾਂਦੇ ਤੇ ਇੰਨਾ ਵੀ ਜੱਫਕਾ ਜੇ ਲੱਗਿਆ ਆਰਟਾ ਦੁਆਰਾ ਸਟਾਰਟ ਹੁੰਦਾ ਹੀ ਨਹੀਂ ਤੇ ਇੱਥੇ ਨਾਲ ਉੱਥੇ ਬਰਾਬਰ ਬੈਠੀ ਬੈਠਦਾ ਰਿਹਾ ਹੂ 10 ਸਾਲ ਤੱਕ ਵੀ ਫਿਰ ਬਾਦ ਨੂੰ ਤੇਰੀ ਵਾਸੀ ਆ